ਤਨ ਗਾਇਏ ਬਹਿ ਚੀਤ ਗਵਾਰ ਤਨ ਸਤ ਸੰਚਿਆ ਨਿਰਮਲ ਨਾਮ ਪਿਆਰ ਤਨ ਗਿਆ ਬਹਿ ਚੂਰੀਏ ਸੰਚ ਜਾਵੇ ਨਾ ਕੋ ਟਾਕਾ ਪਹਿ ਜਾਂਦਾ ਬਹਿ ਚੂਰੀਏ ਬਹਿ ਗਏ ਚੂਦੇ ਦੇ ਲੋਕ ਹੂੰ ਤੁਹਾਡੇ ਗਵਾਰ ਗਵਾਰ ਹੈ ਤਨ ਵਿੱਚ ਤਾਨੂੰ ਆਪਣਾ ਦੱਲਿਆ ਹੋਇਆ ਹੈ। ਤੁਨ ਵੀ ਤੱਲੂ ਮਿਰਲੀ ਕਰ ਚੁੱਕੇ ਸਤਿਆ ਸਾਧ ਸੰਤਿਆ ਉਹ ਤਾਨੂੰ ਵੀ ਇਹ ਸੱਚੇ ਕਠਾ ਕੀਤਾ ਸੰਸਾਰੀ ਤਾਨੂੰ ਵੀ ਪਾਵੇਗਾ ਉਹਨੇ ਆਪ ਨਹੀਂ ਕਠਾ ਕੀਤਾ ਉਹ ਇਕੱਠਾ ਹੋ ਗਿਆ ਆਪੇ। ਅੱਛਾ ਜੀ। ਜੇ ਨਾਲ ਆਪੇ ਇਕੱਠਾ ਹੋ ਗਿਆ ਉਹ ਜਿਹੜੀ ਚੀਜ਼ ਆਪ ਇਕੱਠੀ ਕਰੀਦੀ ਐ ਉਹ ਘਟੇ ਉਹਦੀ ਚਿੰਤਾ ਕਰੀਦੀ ਐ। ਠੀਕ ਲੋਕ ਸਲਤਾਰੇ ਤਾਂ ਇਕੱਠਾ ਕਰਦੇ ਨੇ ਯਤਨ ਕਰਕੇ ਜਾਨ ਮੇਲੇ ਉਹਦੀ ਚਿੰਤਾ ਹੁੰਦੀ ਐ। ਜਿਹੜੇ ਲੋਕ ਨਾਮ ਕਰਦੇ। ਜਿੱਤਾਂ ਨਾਮ ਦੀ ਇਕੱਠ। ਨਾਮ ਤਾਂ ਚਿੰਤਾ ਕਰਕੇ ਇਕੱਠਾ ਕਰਦੇ ਨੇ ਲੋਕ ਤਾਂ ਜਾਨ ਦੀ ਚਿੰਤਾ ਉਹਨੂੰ ਰਹਿਦੀ ਐ ਦੁਆ ਦੀ ਤਾਂ ਚਿੰਤਾ ਰਹਦੀ ਹੋਈ ਦੀ। ਨਰਮਨ ਨੇ ਇੰਤਜ਼ਾਰ ਕਰਕੇ ਕਠਾਈ ਦੀ ਕੀਤਾ ਠੀਕ ਹੈ ਉਹ ਹੋ ਗਿਆ ਹਾਂ ਤੇ ਉਹ ਲਾਗ ਲੈ ਜਿੱਤੇ ਬੈਠੇ ਸੀ ਕਿਤੇ ਦੀਵਾ ਪਾ ਜਗਾ ਸੀ ਵੀ ਬਾਰਿਸ਼ ਪੈ ਗਈ ਝੱਪਣ ਪਰ ਗਿਆ ਠੀਕ ਵੀ ਆਖਾਲੀ ਦੀ ਲੇ ਠੀਕ ਹੈ ਧਨ ਨਿਰਮਲ ਨਾਮ ਪਿਆਸ ਆ ਬਤਾਨਾ ਜਿਹਦੇ ਬਿਜਲੀ ਨੇ ਸੱਚ ਸੱਚ ਆ ਉਹਦਾ ਨਿਰਮਨ ਨਾਮ ਦਾ ਪਿਆਰਾ ਹੈ ਜਿਹੜੇ ਜਿਹਨੇ ਉਹਨਾਂ ਦਾ ਦੂਹੇ ਧਰ ਨਾਲ ਪਿਆਰਾ ਨਾਮ ਦੀਆ ਦੁਆ ਠੀਕ ਹੈ ਮਾਰੇ ਸੱਚਾ ਤਨ ਸੱਚਾ ਤਾਂ ਸੱਚੇ ਗੁਰੂ ਠੀਕ ਹੈ ਜੀ ਤਨ ਗਿਆ ਤਾਂ ਜਾਣ ਦੇ ਜੇ ਰਾਚੇ ਰੰਗ ਏਕ ਮਨ ਦੀ ਜੈ ਸਿਉ ਸਿਰ ਪੀ ਕਰਤੇ ਕੀ ਠੀਕ ਕਾਲੀਆਤਾ ਜਾਣਦੇ ਕਹਨੇ ਜੇ ਤੂੰ ਚਲੇ ਗਿਆ ਵੀ ਪਿਆ ਸੀ ਜੱਪੜ ਭਰ ਗਿਆ ਹੁਣ ਸੁੱਕਦਾ ਧੁੱਪ ਨਾ ਪਿਆ ਸੁੱਕਦਾ ਤੇਰਾ ਕੀ ਕਹਿੰਦਾ ਸੁੱਕੂਗਾ ਇਹ ਤੂੰ ਜਾਣਦੇ ਜੇ ਰਾਚੇ ਆਨ ਅਦੇਕ ਇਹ ਤੂੰ ਇੱਕ ਕਲਮ ਦੇ ਵਿੱਚ ਰਚੀ ਹੈ ਤੂੰ ਰਚੀ ਰਹਿ ਰੰਗ ਦੇ ਇੱਕ ਵਿੱਚ ਤਰੇ ਤੇ ਕੀ ਲੈਣਾ ਜੇ ਰਾਜੇ ਰੰਗ ਇੱਕ ਤਾਂ ਵਾਰਾ ਸੰਪਿਆ ਜਾਵੇ ਕੋਈ ਨਹੀਂ ਚਿੰਤਾ ਦੀ ਲੋੜ ਮਨ ਦੀ ਜੇ ਸਿਰਸ ਭੀ ਕਰਤੇ ਮਨ ਦੀ ਜੇ ਭੀ ਕਰਤੇ ਕੀ ਠੀਕ ਵਰਤਨ ਜਸ ਨਾਤਗੁਰ ਦੇ ਕਿਰਤਨ ਲਿਖਿਆ ਹੋਇਆ ਹੈ ਉਹਦੀ ਠੇਕ ਉਹਦੀ ਹੈ ਆਸਰਾ ਉਹਦਾ ਹੈ ਫਿਰ ਬਾਹਰ ਲੈ ਜਾਂਦਾ ਸੀ ਆਸਰਾ ਹੀ ਨਹੀਂ ਬਾਹਰ ਲੈ ਤਾਂ ਜਾਂਦਾ ਸਾਨੂੰ ਬਾਹਰ ਲੈ ਦੇ ਜਾਣਦਾ ਤਾਂ ਜਾਣਦਾ ਕੀ ਕੀਤਾ ਹੈ ਇੱਕਦਾਂ ਦੇਖਦਾ ਸਤਗੁਰ ਦੀ ਛਾਚੇ ਦੀ ਬਣਾਈ ਹੈ ਤੂੰ ਤਾਂ ਜਾਣਦੇ ਸਾਡਾ ਕੀ ਲਾਜੀ ਸਤਿ ਊਂਦੀ ਲੋੜੀ ਹਾਂਜੀ ਧੰਦਾ ਤਾਬਤ ਰਹਿ ਸ਼ਬਦ ਆਨੰਦ ਦੁਰਜਨ ਤੇ ਸਾਜਨ ਭਏ ਭੇਟੇ ਗੁਰੂ ਗੋਬਿੰਦ ਸਦਾ ਤਾਬਤ ਰਹਿ ਗਏ ਜਿਹੜੇ ਦਿਲ ਕੇ ਰਹਿਣਾ ਹਾਂਜੀ ਧਰਮ ਨੂੰ ਧਰਦਾ ਬਣਾਇਆ ਸੀ ਉਹ ਰਹਿ ਗਏ ਇੱਥੇ ਅਜੇ ਨੇ ਤੇ ਬਹੁਤ ਬਰਦੇ ਰਹੇ ਧਾਰਾ ਬਹੁਤ ਕਮੂ ਜੇ ਚਲੇ ਬਹੁਤ ਚੁਪਤੇ ਗੋਦ ਬਜਾਏ ਵੈਸੇ ਵੀ ਰੱਖੇ ਕੀਤੇ ਅਸਾਂ ਵਾਰਸਾਂ ਤੋਂ ਵਾਂਝੇ ਰਹਿ ਗਏ ਅੰਦਾਜ਼ ਆਵਤ ਰਹ ਗਏ ਉਲਟੇ ਪਏ ਗੁਰੂ ਗੋਬਿੰਦ दुर्जन ਦੇ साजन कौन ਤਾਂ ਹੈ ਉਹਨਾਂ ਕੋਈ ਪਏ ਜਿਹੜੇ ਕੁਛ ਦੇਖੇ ਗੁਰਗੋਵੰਦ ਜਿਹੜੇ ਗੁਰਗੋਵੰਦ ਦੇਖਲੇ ਉਹ ਦੁਰਜਨ ਤੋਂ ਸਾਜਣ ਵੀ ਹੋ ਗਿਆ ਉਹਨਾਂ ਵਿੱਚੋਂ ਵੀ ਠੀਕ ਹੈ ਜੀ ਉਹ ਜਿਹੜੇ ਸਿੱਕੇ ਲੱਗੇ ਰਹੇ ਉਹ ਰਹ ਗਏ ਹੂੰ ਵਨ ਵਨ ਫਿਰਤੀ ਢੂੜਕੀ ਵਸਤ ਰਹੀ ਮਨਮਰ ਬਿਲਦੀ ਢੂੰਢਦੀ ਇਹਦਾ ਬਰਮਰ ਬਿਲਦੀ ਦੀ ਢੂੰਢਦੀ ਕੀ ਢੂੰਢਦੀ ਸੀ ਲੱਕੜੀ ਢੂੰਢਦੀ ਸੀ ਆਪਣੇ ਕੰਮ ਵਾਸਤੇ ਵੀ ਸੀ ਇਹਦੀ ਲੱਕੜੀ ਝਾੜ ਲਈ ਹਾਂ ਸੀ ਹਾਂ ਪਾਸ ਤਰੇ ਘਰਵਾਰ ਵਸਦਾ ਘਰ ਤੇ ਦਰਦੀ ਬਹਾਰ ਕੀ ਢੂੰਢਦੀ ਸੀ ਹਾਂ ਹਾਂ ਫਰੀਦ ਦੀ ਘਰਾਹ ਅਜੇ ਮਨਮਰ ਬਿਲਦੀ ਢੂੰਢਦੀ ਵਸ ਰਹੀ ਘਰਵਾਰ ਸਾਦੋ ਬੇਲੀ ਬਿਲ ਰਹੀ ਤਸਾਦਗੋਲ ਨੂੰ ਵੇਲੀ ਤਾਂ ਬਿਲ ਰਹੀ ਇਹ ਜਨਮ ਮਰਨ ਦੁੱਖ ਨਿਵਾਰ। ਜਨ ਬਲੂਗ। ਦੁਖ ਬਲਦਾ ਤਾਂ ਕੁਦਾ ਪਰ ਚਲੇ ਜਾਂਦੀ ਜਿਹਾ ਤਸਾਦਗੋਲ ਨਾ ਬਿਲ ਗਈ। ਠੀਕ ਹੈ। ਜੁੜ ਜਾ ਦੇਖੋ। ਹਾਂਜੀ ਨਾਨਕ ਕਰ। ਜਤ ਪੰਥ ਤੋਂ ਖੜਿਆ ਜੀ।